अनाशी सुख अपना आसन तय जानव मरण को कहां बिना सुन <laughs> अनाशी सुख अपना आसन मेरा वासी है वो सुख होता है क्योंकि अपने आसन पे बैठो और नाशी ज्यादा या अपने आसन पे ਪਰਦੇਸ ਵਿੱਚ ਬਨਾਸੀ ਦੀ ਹੁੰਦੀ ਹੈ ਸੁਖ ਨੇ ਉਹ ਸਰਦਾ ਚਲੋ ਅਗਨਾਸ਼ੀ ਦਾ ਹੈ ਉਹ ਸੌ ਜਾਂ ਨਾ ਪਰਦੇਸ ਵਿੱਚ ਜੀਤ ਹੁੰਦੀ ਅਗਨਾਸ਼ੀ ਦਾ ਮਤਲਬ ਇਹ ਨਹੀਂ ਹੋ ਜਾਂਦਾ ਸੁਖ ਨੇ ਸੁਖ ਨੇ ਨਾਲ ਤਾਂ ਲੱਗਿਆ ਅਗਨਾਸ਼ੀ ਨਾਲ ਤਾਂ ਲੱਗਿਆ ਮਾਚੀ ਦੇ ਜਿਹਦਾ ਕੋਈ ਹਾਂ ਉਹ ਵੀ ਉਹ ਕਹਿੰਦੇ ਜਿਹੜੇ ਫਿਰ ਗੁਫਾ ਲੱਗੇ ਆਏ ਤੇ ਉਹ ਅਸੱਤ ਆਵਰਨਾਸੀ ਸੁਖਣਾ ਹੋ ਰਿਹਾ ਹੈ ਜੰਦਾ ਨਾਲ ਲੱਗਦਾ ਸਦਾ ਸੁਖਣਾ ਵਾਲਾ ਬਨਾਸੀ ਨਹੀਂ ਕਰਦਾ ਇਹ ਕੀ ਹੈ ਆਵਰਨਾਸੀ ਨੂੰ ਸੋਖਾ ਆਪਣੇ ਅਸੰਤ ਸੁਖੀ ਨੂੰ ਉਹਦੇ ਵਾਸਤੇ ਹੈ ਜੀ ਸੁਖਾ ਜਪਾ ਬਨਾਸੀ ਸੁਖ ਲਈਏ ਦੋਖ ਸਦਾ ਸੁਖੋ। ਉਹ ਇਹਨਾਂ ਸਦਾ ਸੁਖਾਇਆ ਜਾਂ ਸੁਖਾਇਆ। ਹੋਰ ਕਦੇ ਆਪਣਾ ਸੀ ਸੁਖ ਨਹੀਂ ਆਇਆ। ਜੇ ਸੁਖ ਨਾਲ ਨਾ ਸੀ ਲੱਗਦਾ ਹੋਰ ਵੀ ਤੇ ਆ ਜਾਂਦਾ। ਇਸ ਕਰਕੇ ਅਸੀਂ ਬਹੁਤ ਧਿਆਨ ਰੱਖੀ। ਆਪਣਾ ਅਛੀ ਗਿੜਾ ਹੈ ਨਿਯੋਤ। ਇਹ ਕਹਿੰਦੇ ਆ। ਆਪਣਾ ਅਛੀ ਹੋਇਆ ਮੱਦਾ ਗਿੜਾ। ਪਹਿਲੇ ਇਹ ਰੰਗ ਲੱਗ ਗਿਆ ਇਹ ਆਪਾਂ ਕੀ ਹੁਕਾ ਆਇਆ ਹਾਂ ਆਸ਼ੀਏ ਦਿਨ ਆ ਲਿਆ ਇਹ ਆਸ਼ੀਏ ਹੁੰਦਾ ਹੈਗਾ ਫੀਲ ਜੋ ਹੁੰਦਾ ਹੈ ਇਹਨੂੰ ਆਪਣੇ ਆਪ ਸਰਦ ਤੋਂ ਚਲੋ ਇਹ ਕਹਿ ਲਓ ਉਹ ਆਸ਼ੀਏ ਹੈ ਉਹ ਆਸ਼ੀਏ ਆਸਾ ਹੁੰਦੀ ਕਿ ਸੌਂਦੀ ਜਾਗਦੀ ਹੈ ਨਾ ਹੁੰਦਾ ਇਹ ਇਹ ਬੰਨ ਬਰੇ ਦੀ ਯਾਦਾ ਸੀ ਕਹਿੰਿਆ ਦੈਮਾਰਨ ਜੋਗ ਉਹ ਨਾਸੀ ਤੋਂ ਹੋ ਗਿਆ ਹੈ। ਉਹ ਨਾਸੀ ਹੋ ਉਹ ਸੌਣ ਜਾਗਣ ਦੇ ਵਿੱਚ ਹੀ ਜਾ ਫਰਕ। ਜਦ ਸੌਂ ਜਾਂਦਾ ਫਿਰ ਉਹ ਸੁਪਨਾ ਵੀ ਆ ਜਾਂਦਾ। ਜੇ ਸੁਪਨਾ ਆ ਜਾਂਦਾ ਉਹ ਪਰੇਖਾ ਸੁਪਨੇ पे ਆ ਸੁਪਨਾ ਨੂੰ ਤੇ ਖਾਰੀ ਬਣੇਗਾ ਉਹ ਬਾਦਸ਼ਾਹੀ ਦਾ ਵੀ ਹੋਗਾ। ਬਾਦਸ਼ਾਹ ਜਾ ਕੇ ਸੁਪਨਾ ਹੀ ਦੇ ਆਰ ਨਾਸੀ ਸੁਖ ਆਪਣ ਰਸ ਮਸੁ ਹਾਸਤਾ ਜਨਮਾਂ ਨੂੰ ਜਨਮ ਬਣਾ ਸੁ ਜਿੱਥੇ ਚੱਲਿਆ ਨਾ ਹਰ ਪੜਾਏ ਦੇ ਵਿੱਚ ਨਾ ਹੋਵਾ ਜੁੜੂ ਹੈ ਕਾਮ ਕੋ ਦਾ ਹੈ ਤੀਜੇ ਦੋ ਪੜਾਏ ਹੋ ਗਏ ਜੋ ਬੁਣਨ ਸ਼ੁਰੂ ਕਿਥੋਂ ਆਇਆ ਸ਼्लोਕ ਹੀ ਹੈ ਸਰਗੋਣ ਨਿਰਗੁਣ ਦਾ ਸਰਗੋਣ ਨਿਰਗੁਣ ਨਿਰੰਕਾਰ ਸਮੂਹ ਦੀ ਦਰੰਕਾਰ ਦੀ ਗੱਲ ਚੱਲਦੀ ਹੈ। ਸਰਗੋਣ ਨਿਰਗੁਣ ਵਿਚਾਰੋ। ਹਾਂਜੀ। ਸਰਗੋਣ ਨਿਰਗੁਣ ਦਾ ਉਹ ਨਾਲ ਲੱਗਿਆ ਨਾ। ਗੱਲ ਨਿਰੰਕਾਰ ਦੀ ਕਰਦੀ। ਦਰੰਕਾਰ ਨੂੰ ਸੋਖ ਆਪਣੇ ਅਸਨ ਤੇ। ਜਿਹੜਾ ਨਿਰੰਕਾਰ ਦੇਵਿਤ ਭੁਜੰਤਾਰ ਉਹ ਦੇਵਿਤ ਵਿੱਚ ਹੀ ਜਾਂਦਾ ਹੈ। ਸਰੀਰ ਵਿੱਚ ਹੀ ਨੰਤਾਰ ਹੋ ਜਾਂਦਾ। ਪੂਰ ਬ੍ਰਹਮ ਹੋ ਰਹੀ ਜਾਂਦਾ। ਆਪਣਾ ਅਸਰ ਦੇ ਵਿੱਚ ਸੁੱਖ ਤਾਂ ਜ਼ਰੂਰ ਹੈਗਾ। ਪਰ ਉਹ ਯਾਦ ਹੀ ਹੈਗਾ ਸੁੱਖ। ਜਾਂਨ ਕਰਕੇ ਦੇਜਾ ਕੇ ਬਸ। ਕਿਉਂ ਨਹੀਂ ਹੋ ਜਾਂਦਾ। ਆਸ ਵਕਤ ਇਹਦੀ ਆਪਣੀ ਇੱਛਾ ਵਧਾਉ ਉਹ ਨਹੀਂ ਹੋ ਸਕਦਾ। ਇਹ ਪਾਣੀ ਚਲਦਾ ਸਰੀਰ ਕਰਕੇ ਜਿੰਨਾ ਤੱਕ ਤਵੀ ਵੀ ਬਣਦਾ ਹੈ ਸਰਦਾ ਇਹ ਨੂੰ ਵੀ ਕੰਮ ਕਰ ਸਕਦਾ ਯਾਰ ਨੇ ਦਸ ਨੂੰ ਸਫਲ ਜੰਨਾ ਪਾਖੇੜਾਂ ਕਰੇ ਜੇ ਖੇੜਿਆਂ ਵਿਦਿਆਨ ਪੱਛੀ ਆਲੇ ਦਾ ਸੱਚ ਹੈ 70 ਬੱਚੰਦਾ ਆਪਣਾ ਸਾਂ ਦਿਨ ਰੋ ਪਾਣ ਕਰਕੇ ਚਾਹ ਸੈਟੀਸਫਾਈਡ ਹੈ ਦੁਨੀਆਬੀ ਦੇਸ਼ ਕਿਹਨਾਂ ਤੋਂ ਇਹ ਦੁਨੀਆਬੀ ਦੇਸ਼ ਕਿਹਨਾਂ ਤੋਂ ਸੁਖ ਨਹੀਂ ਆਦਾ ਓਏ ਇਹਨੂੰ ਸੁਖ ਨਹੀਂ ਦਿਆ ਉਹ ਕਰਦਾ ਕੰਨਿਆ ਆਲੇ ਦਾ ਸਭ ਸੱਤਰ ਹੈ ਤਾਂ ਸੱਤਰ ਹੈ ਤਾਂ ਕੁਝ ਦੇ ਦੇ ਸੱਤਰ ਤਾਂ ਕੁਝ ਦੇ ਦੇ ਲੁਕਾ ਦੇ ਤੇ ਸਾਡੇ ਜ਼ਮੀਨ ਤੇ ਕਿਉਂ ਕਹਨ ਸੱਤਰ ਇਹ ਜੇਬ ਉਹ ਜੇਤਾਂ ਨੂੰ ਵੀ ਖਿੱਚ ਬਿਨਾਂ ਕੱਪੜੇ ਤੇ ਬਿਨਾਂ ਛੰਡੇ ਕੁਝ ਪਛਾਏ ਤੇ ਬਿਨਾਂ ਕੁਝ ਉੱਤੇ ਲਏ ਤੇ ਨਾ ਪਹਿਣਾ ਨਾ ਇਹ ਸੱਫਾ ਜੋਦਲ ਥੱਲੇ ਵੀ ਨਹੀਂ ਆਈ ਹੋਵੇ ਕਾਹੇ ਗਿਆ ਨਾ ਉਹ ਤੋਂ ਬਿਨ ਰੋਗ ਹੋ ਜਾਈਆਂ ਦਾ ਉੱਡ ਆਪਾਂ ਆਸਮਾਨ ਜਾ ਗਏ ਉਦੋਂ ਸੋਫਾ ਜੜਾ ਉਹ ਅਸਨ ਸਤ ਆਪਣਾ ਅਸਨ ਉਹ 79 ਮਰਨ ਕੋ ਕਹ ਕਹਾ ਬਿਨਾ ਸੁ ਹੈ ਨਾਉ ਤੇ ਬਿਨਾ ਆਸੇ ਨਾ ਤਾਉ ਤੇ ਖਤਰਾ ਬੁੱਢੀ ਦਾ ਐਸੇ ਸੀ ਤੋਦੇ ਬਠਾ ਰੋਗ ਹੋ ਜਾਇਆ ਨਾ ਅੱਛੇ ਸੀ ਛੱਡ ਦਤਾ ਰੋਗ ਹੋ ਜਾਣਾ ਸੀ ਫੇ ਕੌਣ ਫੇਜ ਆ ਗਿਆ ਉਹ ਨਹੀਂ ਸੀ। ਚਾਹ ਚੂਠ ਫਰਾਹੀ ਖਤਰ ਜੇ ਸਰਾਖੇ ਪਾਲੇ ਆ ਜਾਂਦੇ ਫੇ ਹਸਕਾਰ ਵਾਸਤੇ ਆਉਂਦੇ। ਬਟਾ ਉਹਨਾਂ ਪਾਸੇ ਵੱਡਾ ਪੋਜੀਸ਼ਨ ਅਖੰਦਾ ਸਹੀ ਸੀ। ਉਹ ਵੀ ਫਿਰ ਮਹਿਲਾ ਚਾਹ ਆਪਣਾ ਅਸਨ। ਉੱਥੇ ਵਿਨਾਸ਼ ਨਹੀਂ ਆ ਜਾਂ ਮਰਦੀ। ਬੁੱਧੀ ਦਾ ਬਨਾਸਿ ਵਿਨਾਸ਼ ਬੁੱਧੀ ਦਾ ਰਖੇ। ਚਾ ਉਹ ਨਾਸ਼ੀ ਕਹਿੰਦਾ। ਅਵਨਾਸ਼ੀ ਦਾ ਹੈ ਵਿਨਾਸ਼ਨ ਕਿਹੜੀ ਗੱਲ ਦਾ? ਅਕੱਲਾ ਇਹ ਆ ਗੁਨਾਹ ਦਾ ਬਨਾਸ਼ ਨਹੀਂ ਹੁੰਦਾ ਇੱਥੇ ਕੋਣ ਆਸੋ ਸਕਦਾ ਜਬਾ ਅੱਜੇ ਕਬਰਾਂ ਵਿੱਚ ਗੱਲ ਵਿੱਚ ਕਰੇ ਲਿਆ ਕਰਿਆ ਦੀ ਜਿਨਾਂ ਨੇ ਕਬਰਾਂ ਕੀਤਾ ਉਹਨਾਂ ਨੇ ਉਹ ਰਾਹੀ ਦੀ ਮੜੀ ਜਿੱਦਾਂ ਨਾ ਗਾਲਿਆ ਰਕਮੇ ਜਦੋਂ ਕਬਰਾਂ ਵਿੱਚ ਗਾਲਿਆ ਜੂਹਾਂ ਸਾਚੂ ਦਾ ਜੂਹੇ ਕਬਰਾਂ ਵਿੱਚ ਕੀਤਾ ਜੂਹਾਂ ਬਰੋ ਮਰਦਾ ਦੇ ਬੁਢਾ ਹੈ ਦੋ ਨਾ ਤੋਪਰਮਾਇਸ ਕੀਤਾ ਮਾਇਆ ਨਾਲ ਕੰਪਰਮਾਇਸ ਕੀਤਾ ਸੰਸਾਰੀ ਸੁਖਾਂ ਨਾਲ ਕੰਪਰਮਾਇਸ ਕੀਤਾ ਵਿਚਾਰਤਾ ਰਾਹ ਨਾਲ ਕੰਪਰਮਾਇਸ ਕੀਤਾ ਉਹ ਲੋਕਾਂ ਨਾਲ ਤੋਪਰਮਾਇਸ ਕੀਤਾ ਜਿਹੜੇ ਪ੍ਰੈਸ਼ਰ ਪਾਉਂਦੇ ਸੀ ਵੀ ਆਹ ਗੱਲ ਨਾ ਕਰੋ ਆਪਣੀ ਧਰਮ ਤੋਂ ਬਿਲਕੁਲ ਨਵਾਲੀ ਨਾ ਕਰੋ ਥੋੜੀ ਬਹੁਤ ਮਿਕਸ ਕਰਕੇ ਚੱਲੋ ਤਾਂ ਆਪਰ ਹਰ ਕੇ ਰਹੀ ਇਹਨਾਂ ਕੋ ਪਰਮਾਇਸ ਚੱਲਦਾ ਹੈ ਅਵਨਾਸੀ ਸੁਖ ਇਹਦਾ ਸੀ ਨਾ ਕਾਤਬੇ ਸੁਖ ਇਹ ਆਦੇਸ ਦਾ ਸੁਖ ਲੈ ਲਿਆ ਪਰਦੇਸ ਦਾ ਸੁਖ ਹੈ ਜੀ ਪਰਦੇਸ ਦਾ ਸੁਖ ਲੈ ਲਿਆ ਤੇਸ ਦਾ ਸੁਖ ਰਹੇ ਨਾ ਕਰਕੇ ਤੇ ਦੇਸ ਜਸ ਅਵਨਾਸੀ ਸੁਖ ਆਪਾਂ ਉਸਤਾ ਆਚਾ ਸਹਿ ਜਨਮ ਮਾਰਨ ਕਉ ਕਹਾ ਜਨਮ ਮਾਰਣਾ ਨਾ ਉਸ ਜਨਮ ਆਸ਼ਾ ਮਨਾਸ਼ਾ ਦਾ ਬੋਲ ਨਹੀਂ ਕਰਦੇ ਫਿਰ ਉਹ ਗੁਣਾ ਦੇ ਗੌਰ ਨਾਲ ਛਤਰਾ ਨਹੀਂ ਹੈ ਹਰ ਵਿਸ਼ਰ ਵਿੱਚ ਛਤਰਾ ਨਹੀਂ ਹੈ ਨਾ ਉਸ ਮੰਦਰ ਤੋਂ ਬਾਅਦ ਚਲੀ ਗਈ ਜਿੱਨਾ ਚਾ ਪੂਰਨ ਕਰਤਾ ਪ੍ਰਭ ਸੋਏ ਜਮ ਕੇ ਤਰਾਸ ਕੌ ਕਿਸ ਹੋਏ ਪੂਰਨ ਕਰਤਾ ਪ੍ਰਭ ਸੋਏ ਉਸ ਪੂਰਨ ਕਰਤਾ ਹੋ ਗਿਆ ਪਹਿਲਾਂ ਕਰਤਾ ਸੀ ਕਰਤਾ ਪਹਿਲਾ ਵੀ ਹੈ ਪ੍ਰਗਟ ਕਰਦਾ ਫੂਲ ਕਰਦਾ ਉਹ ਤਾਂ ਕਰਦਾ ਜੀਵ ਪੂਰਨ ਕਰਦਾ ਨਹੀਂ ਕੋਈ ਜੀਵ ਕੋਲ ਕਰਤਾ ਹੋਏ ਜੀ ਦੀ ਇੱਛਾ ਨਾਲ ਧੂਆ ਕਮ ਕਰੇ ਇੱਛਾ ਉਹਦੀ ਹੈ ਕਮ ਕਰਦਾ ਰੇ ਕਰਦਾ ਸਾਰੇ ਜੀਵ ਰਹਿਣੇ ਕੰਮ ਜਿਨ੍ਹਾਂ ਦੇ ਨਸ ਪਾਈ ਹੋਈ ਆ ਪਰ ਵਰਤਾ ਉਹ ਰਜ਼ਾ ਕਰ ਰਹੇ ਆ ਜੋ ਵੀ ਰਵਾਜ ਕਰ ਰਹੇ ਦੀ ਦੇ ਰਵਾਜ ਕਰਾਇਨਾ ਬੋਲ ਕਰਦਾ ਬੋਲਣ ਕਰਦਾ ਉਹ ਤਾਂ ਇਸ ਕਰਕੇ ਜਨ ਗਿਆ ਵੀ ਪੂਰਾ ਕਰਦਾ ਹੋ ਉਹ ਕਹਦਾ ਐਸਾ ਜਿਹੜਾ ਸਾਡੇ ਦੇ ਦੂਜਿਆਂ ਨੂੰ ਪੂਰੇ ਕਰਦਾ ਕਬੀਏ ਦੂਰ ਕਰਦਾ ਪਰਉਪਕਾਰੀ ਕਰਦਾ ਜਿਹੜਾ ਜੀ ਆਇਆਂ ਨੂੰ ਜਰੂਰ ਹੈ ਪਰ ਵਰਸ ਦਾ ਕਰਤਾ ਨਹੀਂ ਪਰਵਾਸ ਦਾ ਕਰਤਾ ਪਰ ਨਿਰੂਰ ਉਹ ਜਰੂਰ ਕਰਦਾ ਆਪਣੇ ਆਪ ਨੂੰ ਆਪ ਦਾ ਫੂਲ ਨਹੀਂ ਹੈ ਜੋ ਕੁਝ ਕਰਦਾ ਦੂਜਿਆਂ ਦੀਆਂ ਨੂੰ ਪੂਰਾ ਕਰਨ ਵਾਸਤੇ ਪੂਰਨ ਕਰਦਾ ਪ੍ਰਭ ਸੋਏ ਤਬ ਜਮ ਕੇ ਤ੍ਰਾਸ ਕਹੋ ਕਿਸ ਹੋਏ ਜਦ ਨਿਤਰਾਸਰ ਜੀਤ ਨੂੰ ਪੂਰਨ ਹੋ ਪਾਉਂ ਹੁੰਦੀ ਹੈ ਜੰਮ ਕੇ ਦਰ ਆ ਪ੍ਰਭ ਭਰ ਦੇ ਤਰਾ ਹੈ ਭਰ ਦੇ ਤਰਾ ਸਾਈਂ ਹੈ ਜੰਮ ਕੇ ਤਰਾਸ ਕੀ ਦੀਆ ਜੰਮ ਕੇ ਦਰ ਜਮਣ ਕੇ ਦੇ ਵਿੱਚੋਂ ਭੈ ਨਹੀਂ ਪੈਦਾ ਹੁੰਦੀ ਪਰਮੇਂ ਦੀ ਹੈ ਪੈਦੇ ਤੋਂ ਜਿਹੜੀ ਪਰਮੇਂ ਚੋਂ ਪੈ ਹੈ ਪੈਦਾ ਦੇਖੋ ਜਿਹੜਾ ਸਾਡੇ ਕੋਲ ਜਾਮਾ ਹੋਇਆ ਪਰ ਉਹ ਜਿਹੜੀ ਭਾਇਓ ਤੋਂ ਪਨ ਹੁੰਦੀ ਆ ਸਾਨੂੰ ਦੁਖੀ ਕਰਦੀ ਆ ਉਹ ਤਾਂ ਜਦੋਂ ਜਮਕੀਦਰਾਸਾ ਸ਼ਬਦ ਸਾਡੇ ਕੋਲ ਉਹਦਾ ਜੋ ਪਰਮਚੋ ਜੋ ਪੈ ਪੈ ਦਾਉ ਦਿਉ ਹੇਕਾ ਜਮਤਾ ਕੋਈ ਹੁੰਦਾ ਹੀ ਨਹੀਂ ਰਹੀ ਜੰਮੂ ਦਾ ਗੁਰਵਾਨੀ ਮੰਦਿਰ ਵਿੱਚ ਜਮਕੀਦਰਾਸ ਜੀ ਪਰਮਚੋ ਜੋ ਪੈਦਾ ਹੁੰਦੀ ਆ ਭੈਣ ਉਸ ਪੈਪ ਹੀ ਰਿਟ ਕਰ ਦਿਆ ਸਾਨੂੰ ਤਰਾਸ ਜਰ ਤਰਾਸ ਗਾਡੂ ਬਣ ਪਰ ਬਚੋ ਪੈਦਾ ਹੋਣ ਦਾ ਡਰ ਉਹ ਤੋਂ ਨਹੀਂ ਹੁੰਦਾ ਪਰ ਮੈਨੀਆਂ ਅਗਾ ਡਰ ਕੇ ਤੋਂ ਪੈਦਾ ਮੌਤ ਦਾ ਡਰ ਤਾਂ ਹੈ ਉਹ ਨਹੀਂ ਇਹ ਜੰਮ ਤੋਂ ਅਸੀਂ ਕਰ ਸਕਦੇ ਇੱਕ ਪਾਸੇ ਦਾ ਸੀਗਾ ਨਾ ਵਧਾ ਦਈਏ ਇਹ ਕੋਪਾ ਸੱਟਾ ਨੇ ਉਹ ਬਰਦੋ ਰੁਪਏ ਦਿੱਤੇ ਉਹ ਨਾ ਚੀਰਾਂ ਕਿ ਉਹ ਨਾ ਚੀਰਾਂ ਖਰੀਦ ਰਹੀ ਅੱਛਾ ਕਿ ਉਹਨਾਂ ਸੱਚ ਬੋਲਣਾ ਇਸੇ ਕਰਕੇ ਆ ਖੜੋ ਖੜੋ ਸੱਚਾ ਸਭ ਕੁਝ ਸੁਣ ਕੇ ਵੀ ਸੱਚੀ ਵਿਆਧੀ ਕਰ ਸਕਦੇ ਇਹਨਾਂ ਧਿਆਨ ਰੱਖ ਕੇ ਇਹਨਾਂ ਨੇ ਗੱਲ ਕੀਤੀ ਹੈ ਜਿੰਨਾ ਰੱਖਣਾ ਚਾਹੀਦਾ ਇਹਨੂੰ ਕੁਰਬਾਨੀ ਰਚੀ ਹੋਈ ਹੈ ਇਹਨੂੰ ਅਰਥਾਣ ਬੜੇ ਹੀ ਸਭੀ ਲੱਗ ਜੂਗੇ ਇਹ ਸਮਝ ਗਿਆ ਤੇ ਨਹੀਂ ਸਮਝਦਾ अर्था फालीओ कल सबी के अठोणियो की है। पूरी समझ के नाल खाए दी गयो हांला कहिने तेरा ना गल कहती फिर भी ओ दी हां जब पूर्ण करता प्रभु सोए तब जम की त्रास को मना दे दिमाग चोर नहीं निकली हो, हो। दे दिमाग चोर नहीं निकली हो सिद्धू ਜਨਮ ਮਰਨ ਉਹਨਾਂ ਦੇ ਦੁਆਨਸ ਚ ਨਿਕਲੇ ਆਈ ਹੋਇਆ ਚਾਹੇ ਉਹ ਕਹੀ ਜਾਂਦਾ ਨੇ ਗੁਰਬਾਨੀ ਕਰਾਇਆ ਹੋਇਆ ਨਾ ਪੁੱਤ ਨਾ ਪਾਪ ਉਹਨਾਂ ਦੇ ਦੁਆਨਸ ਚ ਨਿਕਰੇ ਦਾ ਜਨਮ ਬਣਦੇ ਆਵੇ ਇਸ ਕਾਰਨ ਤੇ ਸਾਡੇ ਨਿਕਲੇ ਸਿੱਖਾਂ ਦੇ ਇਹ ਦੋ ਗੱਲਾਂ ਨਹੀਂ ਨਿਕਲੀਆਂ ਆਈਆਂ ਇਹਨਾਂ ਦੇ ਦੁਆਨਸ ਤੋਂ ਬਿਲਕੁਲ ਨਹੀਂ ਦੁਆ ਇਹ ਦੁਨੀਆ ਸੰਸਾਰ ਝੂਠ ਹੈ ਸੁਪਨਾ ਹੈ ਇਹ ਉਹਨਾਂ ਦੇ ਦੁਆਨਸ ਚ ਗੱਲ ਪਈ ਹੋਈ ਹੈ ਸੰਸਾਰ ਨੂੰ ਸੱਚ ਕਰਕੇ ਮੰਨਿਆ ਹੋਇਆ ਜੇ ਸੱਚ ਕਰਦੇ ਨੂੰ ਮੰਨਿਆ ਇੰਨੇ ਮਾਰਾ ਬਾਨੀ ਕਾਦੀ ਐਨਾ ਦੀ ਮੋਟਾ ਪਿੱਛੇ ਵੀ ਸੱਚ ਕਰਕੇ ਮੰਨਿਆ ਆ ਕਿ ਰਿਸ਼ਤੀਆਂ ਵਾਸਤੇ ਮਾਰਾ ਬਾਨੀ ਕਾਦੀ ਐਨਾ ਨਹੀਂ ਰਾਜ ਕਰੇ ਖਾਲਸਾ ਦਾ ਕੀ ਮਤਲਬ ਰਹਿ ਗਿਆ ਤੇ ਸੱਚ ਹੈ ਜੇ ਝੂਠ ਹੈ ਸੁਸਾ ਜੇ ਬੂਤ ਸਭ ਦੇ ਵਿਚਾਰ ਕੇ ਝੂਠੇ ਬੋਲਣ ਤੇ ਵੀ ਝੂਠਾ ਹੈ ਫਿਰ ਲੋੜ ਕੀ ਸੀ ਮਾਰਾ ਮਾਰੀ ਸੀ ਇਹਨਾਂ ਨੇ ਕੁਝ ਨਹੀਂ ਮੰਨਿਆ ਐਵੇਂ ਕਿਹਾ ਕੋਈ ਉਪਰਾਂ ਕਹਿੰਦਾ ਅਵਾਹਾਂ ਨੂੰ ਇਤਾਂ ਉਹ ਇਹ ਕਹਾਸੇ ਕਹਾਲੇ ਵਿੱਚ ਚੜਾਵਾ ਹੁਣ ਇੱਜ਼ਤ ਹੈਗੀ ਸਿੱਖ ਦੀ ਇੱਥੇ ਤਾਂ ਹੋ ਗਈ ਸੀ ਇੱਜ਼ਤ ਉਹ ਸਿੱਖ ਇੱਜ਼ਤ ਉੱਪਰ ਦੀ ਗੱਲ ਹੈ ਸਿੱਖੀ ਮਾਰਸ਼ਲ ਕੌਮ ਬਣੀ ਹੋਈ ਹੈ ਆਪ ਕਹਿੰਦੇ ਸੀ ਸਿੱਖਾਂ ਸਾਡੀ ਜਿੱਤ ਹੋ ਗਈ ਪਤਾ ਲੋਕਾਂ ਨੂੰ ਸਾਰੇ ਨੂੰ ਕੋਈ ਝਟਦਾ ਪਿਆ ਜਿਹੜਾ ਦਾ ਗਰਾਫ ਥੱਲੇ ਆ ਗਿਆ ਸਿੱਖੀ ਦਾ ਇੱਜ਼ਤ ਦਾ ਜਿਹਦਾ ਕਿਹਾ ਹੈ ਜਿਹਦਾ ਵਿੱਚ ਰਸੀ ਦਾ ਕਦੇ ਵਿੱਚ ਇਹਦਾ ਰੌਲਾ ੱੱ ਲਿਆ ਗਿਆ ਉਹਦਾ ਨਾ ਉਹ ਚੀਜ਼ ਤਾਂ ਗੱਲੇ ਨਹੀਂ ਆ ਨਾ ਨੇ ਸੰਭੀਤਨ ਹੋ ਜਾਂਦਾ ਮੁਸਲਮਾਨ ਵੀ ਉਹ ਤੋਂ ਜ਼ਿਆਦਾ ਚਲਦਾ ਲੰਮਟਾੜੇ ਕਾ ਯੂ ਲੜਦੇ ਰਹੇ ਨੇ ਇਹਨਾਂ ਦਾ ਜ਼ਿਆਦਾ ਲੋਕਾਂ ਨੇ ਕਰੋ ਗੁੱਸਾ ਵੀ ਦੇ ਲੋਕ ਇਹਨਾਂ ਦਾ ਦਮ ਟੁੱਟ ਗਿਆ ਰਾਤ ਕਿ ਲੜਦੇ ਫਿਰ ਰਾਤ ਕਿ ਲੜਦੇ ਸਾਰੀ ਲੜਾਂ ਦੁਰੀ ਨੜਦੀ ਹੈ ਹੱਥ ਵੱੜਦੀ ਦੀ ਲੜ ਹੈ ਵੀ ਲੜ ਹੈ ਇਹ ਕੋਈ ਖਾਸ ਲੜਾਈ ਦੀ ਜਿਹੜੀ ਇਹ ਨਾ ਲੜੀ ਹੈ ਇਹ ਦੰਗਾ ਪੀੜ ਤਾਂ ਨੂੰ ਜਲਦੀ ਹਾਂ ਕਿਸੇ ਅਸਰ ਦੇ ਵਿੱਚ ਜਿਹੜੇ ਬਾਹਰ ਉਪਰ ਆਲੂ ਬੈਠੇ ਨੇ ਸਿਆਣੇ ਉਹ ਇਹਨਾਂ ਨੂੰ ਕਿਸੇ ਗੰਤੀ ਚ ਮੰਨਦੇ ਉਹ ਉੱਤੇ ਅਫਸਰ ਨੇ ਗੱਲ ਵਰਗਿਆ ਨੂੰ ਕੀ ਸਮਝਦੇ ਨੇ ਮਿੱਥੀ ਵੀ ਨਹੀਂ ਮੰਨਦੇ ਇਹ ਜਾਣਦੇ ਨੇ ਵੀ ਇਹਦੇ ਪਾਇਲ ਨੂੰ ਸਾਰੇ ਜਿਹੜਾ ਰਾਜ ਪੱਜਲਵੇ ਉਹ ਕਹਨ ਸੂਰਮਾ ਹੁੰਦਾ ਤੇ ਮਾਇਆਮਗਰ ਪੱਜਲਵੇ ਸੂਰਮਾ ਹੁੰਦਾ ਕਾਰਨ ਦਾ ਤਾਂ ਸੂਰਮਾ ਜਿਹੜਾ ਭੱਜੇ ਉਹ ਕ ਉਹ ਸੂਰਮਾ ਹੁੰਦਾ ਸੂਰਮਾ ਤਾਂ ਉਹ ਨੇ ਜਾ ਕੋ ਹਜ਼ਰਾਂ ਅੱਲਾ ਕੋਈ ਇਸ ਜੁਗਮਾ ਸੋ ਕਹੀ ਅਦਾ ਸੂਰਮਾ ਐਜੇ ਕੋ ਨਹੀਂ ਫਿਰ ਪਰਮਾਰਥ ਵਾਸਤੇ ਲੜੇ ਲੋਈ जब पूर्ण करता प्रभु सोए तब जम की त्रास कहो कि सोए तब जम की त्रास कहो कि सोए जम की त्रास सिर पर प्रभु जो कहे कहता रहो जी प्रभु कहता है वादा होता है और जब अवगत अगोचर प्रभु एका सब चित्त गोपत किस पुरुष लेखा जब अभीगत गदौ भी 갔다 हो गया सिर हो गया डग गया अगोचर अगोचर हो गया रुक गया ਡਿਪੈਂਡੈਂਟ ਹੋ ਗਿਆ ਆਜ਼ਾਦ ਹੋ ਗਿਆ ਆਜ਼ਾਦ ਹੋ ਜਾਣਾ ਹੈ ਉਹ ਚੱਲੂ ਆਜ਼ਾਦ ਹੈ ਕਿਸੇ ਦੇ ਗੁੱਚਰੇ ਨਹੀਂ ਹੈ ਡਿਪੈਂਡੈਂਟ ਨਹੀਂ ਰਹਉਂ ਉਹ ਬ੍ਰਹਮ ਇੰਡੀਪੈਂਡੈਂਟ ਹੁੰਦਾ ਹੁਕਮ ਚ ਰਹਿਣਾ ਹੋਰ ਕੁਛ ਹੈ ਪਰ ਡਿਪੈਂਡੈਂਟ ਤਾਂ ਹੈ ਨਹੀਂ ਹੁਣ ਉਹ ਕਿਸੇ ਤੇ ਡਿਪੈਂਡੈਂਟ ਕਾਦੇ ਵਾਸਤੇ ਹੁਣ ਦਾ ਸਪੋਰਟ ਤੇ ਕਾਦੇ ਵਾਸਤੇ ਕੰਡਿਸ਼ਨ ਪੂਰਾ ਉਹ ਤਾਂ ਕੁਝ ਵੀ ਨਹੀਂ ਚਾਹੀਦਾ ਜਦੋਂ ਕੁਝਾਨੂੰ ਚਾਹੀਦਾ ਲੋੜ ਹੈ ਉਹ ਡਿਪੈਂਡੈਂਟ ਆ ਪੂਰ ਬ੍ਰਹਮਿਤ ਤਾਂ ਨਾ ਨਹੀਂ ਗੋਚਿਆ ਰਾ ਪਨੂ ਕਹਿੰਦਾ ਜੇ ਪੂਰ ਨਹੀਂ ਕਰਤਾ ਤਾਂ ਹੋਏ ਪੂਰ ਤਾਂ ਬਣਾ ਸਤ ਸੰ ਜਾਏ ਨਹੀਂ ਸਦੂਰੇ ਤਾਂ ਇੱਥੇ ਆਣ ਅੱਛੇ ਆਲੇ ਜਿਹੜੇ ਨੇ ਜਿੰਨਾ ਜਰ ਬ੍ਰਹਮਾ ਉਹੋ ਚਲ ਹੈ ਡਿਪੈਂਡੈਂਟ ਹੈ ਉਹ ਸਿੱਧਾ ਸਾਰੇ ਸਾਡੇ ਵੀ ਡਿਪੈਂਡੈਂਟ ਭਵਤ ਅਡਵੈਂਟ ਦਾ ਪਾਣੀ ਦਾ ਡਿਪੈਂਡੈਂਸ ਤਾਂ ਉਹ ਜਿਹੜਾ ਉਹ ਅਡਵੈਂਟ ਦਾ ਹਾਂ ਜਦ ਅਵਿਗਤ ਅਵਿਗਤ ਹੈ ਉਹਨ ਸੁਭ੍ਰਕਤ ਅਵਗਤ ਹੈ ਨਹੀਂ ਅਵਿਗਤ ਹੋਣੇ ਵੀ ਰਦੀ ਨਹੀਂ ਬਦਲੀ ਨਹੀਂ ਹੈਗੀ ਪਰਮਪਤੀ ਨੂੰ ਪ੍ਰਾਪਤ ਕਰ ਗਿਆ ਨਾ ਪਰਮਪਤੀ ਹੋ ਗਿਆ ਤੇ ਉਹਦੀ ਹੈ ਸੰਸਾਰ ਵਿੱਚ ਜਿੱਦੇ ਜਿਹੜੇ ਸੰਸਾਰ ਦੇ ਵਿੱਚੋਂ ਚਾਈ ਤੇ ਪਹੁੰਚ ਲਾਂਦੇ ਉਹ ਤਾਂ ਪਹੁੰਚ ਗਏ ਉਥੋਂ ਗਾਂ ਜਾਂ ਅੱਗੇ ਕਿੱਥੇ ਚੀ ਜਾਉਂ। ਆਪਣਾ ਘਰ ਜਾ ਆਉਂਦਾ ਪਹੁੰਚ ਗਿਆ। ਘਰ ਜਾ ਬਹੁਤ ਖੁੱਲ੍ਹਾ ਹੈ ਘਰ ਦੇ ਹੈ। ਮਹਿਲ ਦੇ ਤੇ ਆਪਣੇ ਘਰ ਦੇ ਅੰਦਰ ਜਿਹੜਾ ਤੁਰਨਾ ਫਿਰਨਾ ਉਹ ਉਥੋਂ ਅਭੀ ਜਾਟਾ ਜਾ ਰਿਹਾ ਜਾਂ ਸਫਰ ਵਿਚਾਲੇ ਸਫਰ ਹੈ ਘਰ ਦੀ ਸਫਰ ਨਹੀਂ ਹੁੰਦਾ ਉੱਥੇ ਉਹਦੀ ਸੈਰ ਬੋਟਾਫਾ ਬਾਗ ਹੈ ਉਹ ਸੈਰ ਕਰਦਾ ਉੱਥੇ ਸੈਰ ਲਿਖਿਆ ਹੋਇਆ ਅਭੀ ਜਾਟੋ ਕੇ ਸੈਰ ਕਰਦਾ ਫਿਰ ਉਹ ਮੁਸਾਫਰੀ ਨਹੀਂ ਹੈ ਉਸੇ ਮਰਕਾ ਬਾਗ ਰ ਜਦ ਅਭਿਗਤਨ ਗੋਚਰ ਪ੍ਰਭ ਇਕਾ ਤਬ ਚਿੱਤਰ ਗੋਪਦ ਦੇ ਸਕੂਲ ਤੋਂ ਲਿਖਾ ਤਬ ਚਿੱਤਰ ਗੋਪਦ ਕੋ ਕਚੀ ਥੱਲੇ ਆ ਗਿਆ ਚਿੱਤਰ ਗੋਪਦ ਬੁੱਢੇ ਨੇ ਉਹ ਚਿੱਤੇ ਆ ਜਾ ਲਿਖਾ ਪੁੱਛਦਾ ਉਹ ਥੱਲੇ ਕਿਹੜੀ ਕਿਹੜੀ ਗੱਲ ਹੋਏਗੀ ਗਣੀ ਇਹਨਾਂ ਨੂੰ ਕਹਵੇ ਜਦੋਂ ਇਹ ਹੋ ਜਾਂਦਾ ਕਿ ਦਿੱਤ ਸੁਭ ਲੇਖਾ ਫਿਰ ਚਿੱਤਰਗੁਪ ਕਿੱਥੇ ਹੁੰਦਾ ਕਿਉਂ ਲੇਖਾ ਕੋਈ ਦਾ ਉਹ ਇਹ ਦਾ ਮਨੈ ਚਿੱਤਰਗੁਪ ਕਿਉਂ ਹੁੰਦਾ ਨਹੀਂ ਜਿਸ ਨੂੰ ਵੀ ਉਹਦਾ ਹੁੰਦਾ ਨਹੀਂ ਚਿੱਤਰਗੁਪ ਤਾਂ ਕੀ ਲੇਖਾ ਪਛਣਦੀ ਭਾਈ ਇੱਥੇ ਵੀ ਇਹ ਹੈ ਕਿ ਜਦੋਂ ਇਹ ਇੱਕੋ ਹੀ ਫਿਰ ਉਦੋਂ ਚਿੱਤਰਗੋ ਸਾਰੀ ਜਿਵੇਂ ਬਹਿਲਪੁਰੀਏ ਪੁੱਤਰ ਕਵਦੋ ਜਸਾਲਪੁਰੀਏ ਆਪਣੇ ਇੱਕੋ ਪੁਰੀ ਦੇ ਵਿੱਚ ਸਾਰੇ ਨੇ ਸਾਰੇ ਜਦੇ ਕਬਰ ਖੜੇ ਹੋਏ ਨੇ ਸੱਚ ਨੂੰ ਸੱਤ ਕਹੇ ਸਭ ਕੋਈ ਜਦ ਸੱਜੋ ਉਹਦੇ ਸਾਰੇ ਹੀ ਸੱਤ ਬੋਲਣ ਕਿਸ ਪੱਥਰ ਰੱਖਦੇ ਨੇ ਸਰਕਾਰ ਗੁਰੂ ਮੁਖੀ ਭਗਤੀ ਹੋਈ ਘਰ ਦੇ ਥਾਰ ਕਰਦੇ ਵਿੱਚ ਗੁਰਮਤਿ ਨਹੀਂ ਸੋਚੀ ਹੈ ਉਤੇ ਚਿੱਤਰ ਕੋਪ ਤੇ ਲੇਖਾ ਕਿਨੂੰ ਪੁੱਛੂਗਾ ਵਜਾ ਨਮਨ ਜੈ ਦੀ ਗੱਲ ਓਹੀ ਗੱਲ ਚੱਲਦੀ ਹੈ ਹੈ ਸੋਈ ਰਚਨਾ ਨਹੀਂ ਹੈ ਜੋ ਹੈ ਜੀ ਰਚਨਾ रचना ਹੈ ਤੁਸੀਂ ਇਹ ਮਤ ਸਮਝੋ ਵੀ ਰਚਨਾ ਦੇ ਵਿਚੋ ਅਸੀਂ आज ਜਨਾ जना ਹੈ है चित्र को पता है और नहीं चित्र को पता है लेखा गिन पूछना जब अभी का तब वो गोचर वो गोचर अंतर नहीं के सते अंतर आना चाहिए सरे चित्र को होते अंतर होवे चित्र को होते अंतर होवे ना गोचर ਫੇਰ ਇਹਨੂੰ ਲੇਖਾ ਕਹਿੰਦੇ ਕਿ ਸਭ ਚਤੁਰਗੁਪਤ ਦੇ ਸੂਤਰ ਲੇਖਾ ਕਿਵੇਂ ਲੇਖਾ ਪਛਣਾ ਜੀ ਉਦੋਂ ਲੇਖਾ ਨਹੀਂ ਹੁੰਦਾ ਆ ਜੋ ਰਚਨਾ ਤੋਂ ਦੀ ਉਹ ਗੱਲ ਹੈ ਸਾਰੀ ਇਸ ਵਿਸ਼ਨੂੰ ਮੰਨੀ ਬੈਠੇ ਹੋ ਰਚਨਾ ਵਿਸ਼ਨੂੰ ਤਾਂ ਸ਼ੁਰੂ ਹੋਦੀ ਹੈ ਫਿਰ ਚਤੁਰਗੁਪਤ ਕਾਦ ਬਣਾਏ ਕਿਨੇ ਬਣਾਏ ਭਾਈ ਉਹ ਤੁਸੀਂ ਦੱਸ ਦੇਈ ਜੀ ਚਤੁਰਗੁਪਤ ਦੇ ਸੂਤਰ ਲੇਖਾ ਲੇਖਾ ਹਾਂ ਜਦ ਨਾਥ ਨਰਿੰਦਰ ਅਗੋਚਰ ਅਗਾਧੇ ਤਾਉ ਕੌਣ ਛੁਟੇ ਕੌਣ ਬੰਧਨ ਵਾਦੇ ਜਦ ਨਾਥ ਹੈ ਨਾਥ ਨਰਿੰਦਰ ਦੇਖਣ ਅਗੋਚਰ ਨਾਥ ਜਿਹੜੇ ਨੇ ਜੋਗੀ ਨੇ ਉਹਨਾਂ ਅੰਦਰ ਕਹਿੰਦੇ ਲਾਭ ਬਰਤਦੇ ਜੀ ਜਿਹਦੇ ਨਾਥ ਆ ਲੱਗੋ ਜੀ ਜੋਗੀ ਜੇ ਨਾਥ ਨੱਟਣੇ ਜਦ ਜੇ ਤੁਸੀਂ ਜੋਗੀਆਂ ਨੂੰ ਕਹਿੰਦੇ ਕਦੇ ਜੋਗੀਆਂ ਨੂੰ ਕਹਿਆ ਕਦੇ ਪੰਡਤ ਨੂੰ ਕਹਿਆ ਕਦੇ ਕਿਸੇ ਨੂੰ ਕਿਹਾ ਸਾਰੀਆਂ ਭਾਸ਼ਾਵਾਂ ਤਾਂ ਲਈਆਂ ਹੋਈਆਂ ਨੇ ਤਾਂ ਸਾਰੇ ਹੋਣੇ ਨਾ ਕੋ ਐਕਟਿਵ ਜੇ 나ਥੁਰਜਨ ਮੈਂ ਕਹਿੰਦਾ ਜੋਗੀ ਤਾਂ ਵਜਗੇ ਸੀ ਉਹ ਪੰਡਤ ਦੀ ਗੱਲ ਹੈ ਚੇਤਰ ਕੋ ਪਤਾ ਨਹੀਂ ਗੱਲ ਜਦ 나ਥ ਤਾਂ ਰਜਨ ਉਹ ਵੀ ਉਹ ਚਿਰ ਜਾਤ ਨੂੰ ਇਜ਼ਲ ਵੀ ਕੋਚਰ ਅਗਾਦੇ ਤੁਸੀਂ ਉਹਦੇ ਦੇ ਨਾਲ ਇਲੂਜਨ ਕੋਚਰ ਅਗਾਦੇ ਅਗਾਦ ਹੈ ਤੁਸੀਂ ਤੋਂ ਮੁੱਖੀ ਤੋਂ ਪਰੇ ਹੋ ਜੋ ਵੀ ਕੁਝ ਆਗਾਦੇ ਬੰਦੇ ਹੋ ਤੁਸੀਂ ਉਹਨੂੰ ਜਦੋਂ ਕੱਲਾ ਹੀ ਆ ਹੋਰ ਕੋਈ ਹੈ ਨਹੀਂ ਜਦੋਂ ਕੱਲਾ ਹੋਰ ਕੁਝ ਨਹੀਂ ਹੈ ਕੱਲਾ ਹੀ ਨਾਜ਼ਤ ਬਜਨ ਕੋਚਰ ਅਗਾਦੇ ਤਦ ਕੌਣ ਛੋਡੇ ਕੌਣ ਬੰਨਣ ਵਾਤੇ ਉਹ ਤਾਂ ਬੱਤਨ ਦੇ ਛਡਕਾਰਾ ਸੀ ਤੇ ਇਹ ਬੱਤਨ ਆ ਛਡਕਾਰਾ ਕਦੋਂ ਆ ਕਿਵੇਂ ਹੋਇਆ ਇਹਦਾ ਜਵਾਬ ਦੁੱਬਣਾ ਰਚਨਾ ਜਵਾਬ ਇਹਨਾਂ ਨੇ ਕਦੇ ਦਿੱਤਾ ਹੀ ਨਹੀਂ ਜ਼ਬਰਦਸ਼ਤ ਅਸਰ ਆਣੀ ਰਚਨਾ ਰਚੀ ਗਈ ਕਿਵੇਂ ਰਚੀ ਗਈ ਨਾ ਰਚਨਾ ਪ੍ਰਭਰਤੀ ਬਹੁ ਵਿਧੀ ਅੰਕ ਪ੍ਰਕਾਰ ਉਹ ਤਾਂ ਭਿਜਤ ਹੁਣ ਨੇ ਤਾਂ ਤੇ ਜਿਆਦਾ ਐ ਸਿੱਧਾ ਰਜਨਾ ਕਿਵੇਂ ਰਜੀ ਨਹੀਂ ਦੱਸ ਤੇ ਆਪਾਂ ਦੱਸਿਆ ਨਾਨਕ ਰਚਨਾ ਪ੍ਰਵਰਤੀ ਹੋਵਦੀ ਅਨੁਸਾਰ ਪਿਛਲੇ ਆਤਮਾ ਦੀ ਜਨ ਹਾਂ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਆਪ ਆਪ ਹੀ ਚਲ ਇਹ ਆਪਣੇ ਆਪ ਚ ਚੱਲਦੀ ਗੱਲ ਐ ਕਿ ਆਪਣਾ ਰੂਪ ਇਹਨੇ ਆਪ ਹੀ ਬਣਾ ਕੀਤਾ ਚਾਹੇ ਇਹਨੇ ਪੈਦਾ ਕਰ ਲਿਆ ਪੂਰਨ ਬ੍ਰਹਮ ਦਾ ਰੂਪ ਚਾਹੇ ਕਰ ਲਿਆ ਇਹਨੇ ਦਾਗ ਦਾ ਰੂਪ ਇਹਨੇ ਆਪਣੇ ਪੈਰ ਜਗ ਦਾ ਕੋਹੜਾ ਮਾਰ ਕੇ ਬਣ ਗਿਆ ਦਾਗ ਚਾਹੇ ਇਹ ਬਣ ਗਿਆ ਪਰਮ ਦੋ ਰੂਪ ਹੋਵੇ ਉਹਨਾਂ ਦੇ ਫਰੋਚਤ आगे ਅਗਤ रूप बन जाने ਨੰਡਰ ਜਾ ਕੇ ਜੇਤਾ ਮੰਦੇ ਲੈਵਲ ਤੇ ਸੋਚ ਸ਼ੁਰੂ ਹੋ ਗਈ ਮਨ ਅੱਡ ਹੋ ਕੇ ਸੋ ਚੱਲਣ ਲੱਗਿਆ ਸੇਤਾ ਯੁਗ ਮਾਇਆ ਜੀ ਸੇਤਾ ਦੋਫਾੜ ਹੋ ਜੂ ਜੇਸ ਵਾਰਤ ਦੇ ਲੈਵਲ ਤੇ ਸੋ ਚੱਲਣ ਲੱਗਿਆ ਹੋਂ ਮੈਂ ਆ ਗਈ ਆਪਣੀ ਅਕਲ ਨੂੰ ਵੱਡਾ ਮੰਨ ਕੇ ਸੋਚਣ ਲੱਗਿਆ ਆਪਣੀਆਂ ਦਲੀਲਾਂ ਦੇ ਅਸਲ 'ਚ ਆਪਣੀ ਅਕਲ ਨੂੰ ਵੱਡਾ ਬਣਾ ਦੇ ਉਹ ਕੋਈ ਬੰਦੇ ਆ ਰੂਪ ਬਵਰੀ ਇਹ ਜੋ ਬਹੂ ਰਹੀ ਆ ਕਰ ਐ ਹੁੰਦੀ ਆ ਕੋਈ ਚੀਜ਼ ਪਲਾਨਿੰਗ ਬਣਦੀ ਹੋ ਜਿ ਡਿਫਰੈਂਟ ਰਾਇ ਦਾ ਹੋਈ ਤਾਂ ਜੀ ਆਪਨ ਆਪ ਹੀ ਅਜਰਜਾ ਨਾਨਕ ਆਪਣਾ ਰੂਪ ਆਪ ਹੀ ਉਪਰ ਜਾ ਆਪਣੇ ਆਪ ਦੇ ਵਿੱਚ ਅਚਰਜ ਗੱਲ ਇਹ ਹੈ ਕਿ ਇਹਦੇ ਆਪਣਾ ਰੂਪ ਆਪੇ ਪੈਦਾ ਕੀਤਾ ਆਪ ਹੀ ਉਪਰ ਰੂਪ ਦੇ ਮੰਨੂ ਹਾਲੇ ਰੂਪੀ ਬਣ ਗਿਆ ਆਪੇ ਰੂਪ ਉਹ ਰੂਪ ਕੀ ਹੈ ਇਹਨੇ ਆਪਣੇ ਅੰਦਰ ਇੱਛਾ ਇਛਾ ਦਾ ਰੂਪ ਹੈ ਇਹਨੇ ਆਪਣੇ ਅੰਦਰ ਇੱਛਾ ਪੈਦਾ ਕੀਤੀ ਜੇ ਤਾਂ ਇੱਛਾ ਹੈ ਇਹ ਵੀ ਸੌਖੀ ਜੀ ਜੇ ਤਾਂ ਇਹ ਇੱਛਾ ਆਪਣੀ ਬੁੱਧੀ ਦੇ ਸਾਬਤ ਕਰਨਾ ਚਾਹੁੰਦਾ ਮੇਰੀ ਅਕਲ ਵੱਡੀ ਆ ਇਹ ਇਛਾ ਇਹਦਰ ਸਾਬਤ ਕਰਨਾ ਚਾਹੁੰਦਾ ਮੈਂ ਮਾਸ਼ਾਅੱਲ ਇਹ ਸੋਚ ਹੈ ਸਿਆਣਾ ਬਣਦੀ ਦਲੀਲਾਂ ਦੇ ਰਿਹਾ ਫਿਰ ਤਾਂ ਹੁੰਦਾ ਹੀ ਫਿਰ ਤਾਂ ਫਿਰ ਤਾਂ ਉਹ ਬਿਮਾਰ ਫਿਰ ਤਾਂ ਰਸਤਾ ਹੋ ਗਿਆ ਇਹ ਬਿਮਾਰੀ ਤੋਂ ਫਿਰ ਤਾਂ ਬਿਮਾਰ ਹੋ ਗਿਆ ਹੈ ਫੋਮੇ ਤੋਂ ਕਰ ਸੋ ਗਿਆ ਫਿਰ ਜੇ ਵੀ ਰਹਿਣੀ ਮਿਲਦੀ ਕਿਸ ਨਾ ਦਲੀਲਾਂ ਦੇਣ ਲੱਗਿਆ ਕਿ ਮੈਂ ਜੀ ਠੀਕ ਹਾਂ ਮੈਂ ਠੀਕ ਹਾਂ ਫਿਰ ਤਦ ਤਰ ਸੋ ਗਿਆ ਫਿਰਦਾ ਹੈ ਇਹ ਹੋ ਗਿਆ ਪਾਗਲ ਪਾਗਲ ਆਦਮੀ ਕਦੇ ਵੀ ਦੀ ਬੰਦਾ ਹੁੰਦਾ ਵੀ ਮੈਂ ਪਾਗਲ ਆ ਪਾਗਲ ਕਹਾਂਗਾ ਦੇਖੋ ਦੂਆ ਆਦਮੀ ਦੂਜਾ ਕੋਈ ਤੀਜਾ ਆਦਮੀ ਹੁੰਦਾ ਉਹ ਨੂੰ ਬਿਲਕੁਲ ਸੱਚ ਬਣਾ ਦਿੰਦਾ ਵੀ ਇਹਨਾਂ ਨੂੰ ਸਮਝਾ ਮੈਨੂੰ ਪਾਗਲ ਬੰਦ ਤੇ पागल है नमाज़ में बिल्कुल कहना भी बिल्कुल सयानी बात करता है तू यार है नु बरतले है उस्ताद समझ गए वो सच मना देंदा है वो फिर डांट भी तू छोड़ देया असि पहला मैंने एक बार बोल चुके हां कि कहते आगे चला आता था पता ते कोई बात बोलया ਪਰ ਜਦ ਇਹਨੇ ਉਹ ਹੀ ਹੱਥ ਚਲਾਉਣਾ ਸ਼ੁਰੂ ਕਰਤਾ ਬੇਲ ਆਈ ਹਿੰਦੀ ਦੁਹਾਂ ਸਾਨੂੰ ਇਹ ਘਮਨਾ ਨਾ ਬੰਨੇ ਆਤਾ ਸਾਨੂੰ ਡੇੜੇ ਨਹੀਂ ਆਉਣ ਦਿੱਤਾ ਇਹਨੇ ਬੜਾ ਗੁੱਸਾ ਨਾਲ ਖਾਬੂ ਕੀਤਾ ਸੂ ਰਹਿਣ ਦੇ ਇਹ ਬਹੁਤ ਦਲੀਲਾਂ ਪੂਰੀਆਂ ਜਾਣਦਾ ਗੁਰਮਤ ਦੇ ਮੁਕਾਬਲ ਕਿੰਨੀਆਂ ਬੱਤਾਂ ਮਲਾਈਆਂ ਬੈਠੀਆਂ ਨੇ ਸਾਰੀ ਦੁਨੀਆ ਮਗਰ ਲਾਈ ਫਿਰਦੇ ਨੇ ਲੋਕ ਇਹ ਬਹੁਤ ਦਲੀਲਾਂ ਜਾਣਦੇ ਨੇ ਇਹ ਬਹੁਤ ਸਿਆਣਪ ਇਹਨਾਂ ਦੇ ਵਿੱਚ ਬਹੁਤ ਸਿਆਣਪ ਵਰਤੀ ਹੈ ਜਦ ਦਾ ਭੌ ਦੇ ਅੱਪਾ ਸਾਂਤ ਹੈ ਜੀ ਆ ਜਿੰਨਾ ਪਰਮ ਦੇ ਸਾਂਤ ਇਹਨਾਂ ਦੀ ਪਰਮ ਦਾ ਗੱਲ ਨਾਲੀ ਹੈ ਇਹਨਾਂ ਦੀ ਸਿਆਣਪ ਦੇ ਵਿੱਚੋਂ ਜਦ ਦਾ ਭੌ ਪਿਆ ਦੁਨੀਆਂ ਦੇ ਜਿਹੜੇ ਵੱਡੇ ਕਲਾਕਾਰ ਵਿਦਵਾਨ ਨੇ ਜਿਨ੍ਹਾਂ ਨੇ ਬੱਤਾਂ ਬਣਾਈਆਂ ਨੇ ਉਹਨਾਂ ਨੇ ਇਹ ਸਭ ਜਾਲ ਬਣਿਆ ਉਹ ਜੋ ਭੈਓ ਬੈਦਾ ਕੀਤੀ ਹੈ ਨਿਰਭੈ ਜੀ ਰੱਖੀ ਹੈ ਬਹੁਤ ਸਿਆਣਪ ਜਪਕਾ ਤੋਂ ਅਨਤ ਜੇਤਨ ਕਰ ਤ੍ਰਿਸ਼ਨਾ ਨਹੀਂ ਕਾਲੇ ਵਾਸਤੇ ਤ੍ਰਿਸ਼ਨਾ ਵਾਸਤੇ ਕੀਤਾ ਸਭ ਕੋਈ ਤਾਨਾ ਬਾਣਾ ਬਣਿਆ ਤ੍ਰਿਸ਼ਨਾ ਠੀਕ ਨਹੀਂ ਹੋ ਰਹੀ ਉਹਦਾ ਮਤਾਨਾ ਤ੍ਰਿਸ਼ਨਾ ਸਭ ਵੱਧ ਥੋੜੇ ਕਾਲਾ ਕਾਲ ਨਾ ਬਰਾਬਰ ਹੀ ਕੋਈ ਫਰਕ ਨਹੀਂ ਹੈ ਉਹ ਬਰਾਬਰ ਦਾ ਹੀ ਨੇ ਸਾਲ ਭੇ ਉਹ ਤਾਂ 15000 ਦੋ ਲੱਖ ਤੇਰੀ ਬਾਹ ਡਲੀ ਹੈ ਆਪਰ ਨਹੀਂ ਨੇ ਹੋ ਜਿੰਨੀਆਂ ਦਲੀਲਾਂ ਸਿੱਧੀਆਂ ਨੇ ਉਹ ਨਹੀਂ ਇਹ ਕੁੱਟੀਆਂ ਨੇ ਪਾਈ ਦਾ ਫੈਸਲਾ ਨਹੀਂ ਹੁੰਦਾ ਸਾਜਾ ਟੁਰਦਾ ਸਾਜ ਨੂੰ ਜਿੱਦਾਂ ਕੋਈ ਥੋੜੀ ਬੁੱਧੀ ਦੀ ਗੱਲ ਨਹੀਂ ਹੈ ਸੰਸਾਰੀ ਬੁੱਧੀ ਨਾਲ ਸਾਜ ਦੇ ਸੰਸਾਰ ਕੋ ਜਿਹੜੀ ਬੁੱਧੀ ਉਹ ਤਾਂ ਸਮਝੇ ਦੀ ਅਸਲ ਸੰਸਾਰੀ ਬੁੱਧੀ ਨੂੰ ਜੇ ਗੁਰਮਤਿ ਸਮਝਉਂਦੀ ਜਿਹੜਾ ਗੁਰਮਤਿ ਜਿਹੜਾ ਜਦਿਆ ਇਹ ਬੁੱਧੀ ਬੇਖ ਬੁੱਧੀ ਹੈ ਇਹ ਪੂਰਨ ਬ੍ਰਹਮ ਦੀ ਬੁੱਧੀ ਹੈ। ਸੱਚਾਈ ਬੁੱਧੀ ਦਾ, ਸਾਧਰ ਬੁੱਧੀ ਹੈ। ਸਦਾਰ ਦੀ ਬੁੱਧੀ ਸਾਧਰ ਬੁੱਧੀ ਹੈ। ਸਾਧਰ ਦਾ ਵੱਡੇ ਵੱਡੇ ਨੂੰ ਫਸਰ ਦਿੰਦਾ, ਧੋਖਾ ਦਿੰਦਾ। ਸਾਧਰ ਦਾ ਕੀ ਕੰਮ? ਉੱਥੇ ਤੁਹਾਡਾ ਪੈਰ ਦਿਖਾਉਗਾ ਜਦ ਤੱਕ ਇਕੱਠਾ ਦੇ ਦਿਲੂ ਐਸਾ ਤੁਹਾਨੂੰ ਪਿੱਛੇ ਲਾਊਗਾ ਕਿ ਉੱਥੇ ਤੁਹਾਡਾ ਪੈਰ ਦਿਖਾ ਦੇਣਾ ਜਦੋਂ ਤੁਸੀਂ ਆਪੇ ਡਿਪੈਂਡ ਹੋ। ਤੂੰ ਤਾਂ ਖਾਲੇ ਦੀ ਲੋੜ ਨਹੀਂ ਪੈਣੀ। ਉਜਾਇਆ ਜਿਉ ਫਿਰ ਤਾਂ ਕਣ ਲੋਕੀ ਜਿਹਾ ਪਾਇਆ ਰਖਾ ਦ ਤੁਸੀਂ ਆਪ ਇਹ ਦਿੱਤਾ ਲੈ ਉਹਦਾ ਕਾੜੀਓ ਬਾਦ ਦੀ ਬਾਕ ਚ ਇਹ ਦੇਖਿਆ ਜੇ ਲੋਕ ਤਾਂ ਅਜੜੀਆਂ ਮੱਤਾਂ ਬੜੀਆਂ ਆਈਆਂ ਨੇ ਸਦਰਾਂ ਦੀ ਕਰੋੜਾ ਕਰੋੜਾ ਆਦਮੀ ਬੇਖੂਬੜਾ ਇਹ ਨਾ ਮੱਤਾਂ ਦੇ ਲੱਖਾਂ ਆਦਮੀ ਸਰਦੇਲ ਨੂੰ ਫਜ਼ਲ ਹੈ ਨਾ ਖਤਰ ਇਹਨਾਂ ਮੱਤਾਂ ਵਾਸਤੇ ਪਰ ਉਹ ਤਾਂ ਹੈ ਕਿ ਹੈ ਵਾਸਤੇ ਸਿਰ ਦੇਵਾਂਗੇ ਕੋਲ ਸਿਰ ਦੇਣ ਵਾਲੇ ਕਹਿੰਦੇ ਵਾਸਤੇ ਪਰਮਾਤਮਾ ਵਾਸਤੇ ਨਹੀਂ ਦੇਦੇ ਦੇਦੇ ਵਾਸਤੇ ਕੀ ਆਏ ਪਰਮਾਤਮਾ ਬੇਵਕੂਫੀ ਦਾ ਪਰਮਾਤਮਾ ਜਾਂ ਜੀ ਕੀ ਨਹੀਂ ਦਿਆ ਜਾਣੇ ਜੀ ਕੀ ਹਾਂ ਜੀ ਵਾਹ ਅੱਗੇ ਬੈਠਾ ਬੜਾ ਵੈ ਹਾਂ ਜੀ